ਸੋਈਆ ਆਣ ਜੁਰੇਂਦਰਪ ਮੰਡਲ ਜੇਤ ਕੇ ਤੇ ਸਵੇ ਤਿੰਨ ਤਾਸ ਦਿਖਾਏ ਦੇਖ ਫਿਰਿ ਤੋਂ ਚੱਕਰਨ ਕੋ ਨਿਰਪ ਰਾਜਕੁਮਾਰੀ ਹਿਰਦੇ ਨਹੀਂ ਲਿਆਏ ਹਾਰ ਪਰਿਓ ਸਭੀ ਪਟੰਡਲ ਪੂਪ ਦੇਰ ਦਸਾ ਮੁਰਝਾਏ ਫੂਕ ਗਏ ਮੁਖ ਸੁਕ ਗਏ ਸਭ ਰਾਜਕੁਮਾਰੀ ਫਿਰੇ ਘਰ ਆਏ ਸੋਈਆ ਤੋ ਲਗਿਆਨ ਗਏ ਅਜ ਅੰਬਰਨ ਰੂਪ ਧਰੇ ਪਸੰਬਰ ਸੰਬਰ ਕੇ ਅਰਕੀ ਕੀ ਛਬ ਚੀਨੇ ਵੇਖਨ ਵੇਖ ਜੜੇ ਸੰਗ ਹੈ ਨਿਰਭਾਨ ਸਭੈ ਸੁਖ ਧਾਮ ਨਵੀਨੇ ਆਣ ਗਾਇਆ ਜਰ ਕੰਬਰ ਸੇ ਆਜੇ ਅੰਬਰ ਸੇ ਨਿਰ ਕੰਬਰ ਕੀਨੇ ਸਵਈਆ ਪਾਤ ਬਣਾਏ ਬੜੋ ਦਲ ਢੋਲ ਮਿਰਦੰਗ ਸੁਰੰਗ ਬਜਾਏ ਭੂਖਣਝਾਰ ਦੇ ਪੈ ਸਵਿਆਂਗ ਬਿ ਪ੍ਰਵਾਹ ਮੁਰਛਾਏ ਬਾਜਤ ਚੰਗ ਮੁਰ ਗੰਗੂ ਸੁਰੰਗ ਸੋਨਾ ਸਵੈ ਸੁ ਪਾਏ रीत रहे रविवार सवे लाख रूप अनूप सरात आए जैस स्वरूप लिख्यो आज को हम तए स्वरूप न और बिचारे चंद चपियो लख कह मुख की इच्छा वो छेद परे उर में रिस मारे तेस रूप विलोक के भाव के चित त्रिग्रह और नजारे जैस प्रवाल लिख्यो आज को हम तए स्वरूप न भूप निहारे सुंदर जान स्वरूप महान प्रधान चाहू चक मैं हम जान्यो पान समान प्रभान प्रमाण के राव के रान महान खान्यो देव देव चके अपने चित चंद स्वरूप निसा पहचान्यो देवस कै पाण सुयो भगवान पहचान मन खान मूरन मान्यो बोल उठे पिग जान वसंत चपर्ण चंद स्वरूप बखान्यो शा स्वभाव लख्यो सब साधन ज्योंदन क्रोध पर तच बालन बाल स्वभाव लख्यो तहे सत्रण काल स्वरूप पहचान्यो ਦੇਵਨ ਦੇਵਾ ਦੇਵਨ ਕਹਿ ਸਿਵ ਰਾਜਨ ਰਾਜ ਬਡੋ ਜੀ ਜਾਣਿਓ ਸਾਧਨ ਸਿਧ ਸਰੂਪ ਲਖਿਓ ਤੇ ਸਤਰੁਣ ਸਤਰ ਸਮਾਨ ਵਸੇਖਿਓ ਚੋਰਨਪੂਰ ਕਰੋਰਨ ਮੋਰਨ ਤਾਸ ਸਹੀ ਘਣ ਕਹਿ ਅਵਰੇਖਿਓ ਕਾਮ ਸਰੂਪ ਸਭੈ ਪੁਰਨਾਰਨ ਸੰਭੂ ਸਮਾਨ ਸਭੂ ਗਨ ਸੀਵ ਸੁਆਨ ਕੀ ਬੂਤਿ ਸਹਿ ਕਰ ਰਾਜਨ ਰਾਜ ਬਡੋ ਤੇ ਪੇਖਿਓ ਕੰਬਰ ਜਿਉ ਜਰ ਕੰਬਰ ਕੀ ਢੇਗ ਤਿਉ ਅਵੇ ਨੰਬਰ ਤੀਰ ਸੁਹਾਏ ਨਾਕ ਲਖੇ ਰਸਮਾਨ ਸੁਆ ਮਨ ਦੋ ਦਉ ਲਖੀਨ ਲਜਾਏ ਪੇਖ ਗੁਲਾਬ ਸ਼ਰਾਬ ਪੀਐ ਜਨ ਪੇਖ ਤੇ ਅੰਗ ਅਨੰਗ ਰਸਾਏ ਕੰਠਕਪੋਦ ਕਟੂ ਪਰਕੇ ਹਰ ਰੋਸ ਰਸੇ ਗ੍ਰਹਿ ਪੂਲ ਨਾ ਆਏ ਪੀਖ ਸਰੂਪ ਸਰਾਦ ਨਾ ਲੋਚਨ ਕੂਟਤ ਹੈ ਜਨ ਕੂਟ ਅਮੀਕੇ ਗਾਉਤ ਗੀਤ ਬਜਾਵ ਤਾਲ ਬਜਾਵਤ ਹੈ ਜਨੋ ਆਛਰਹੀਕੇ भावत नार सुहावतगार दिवाबत है पर आनंद जी के तू सो कुमार जी करतार कह अविचार त्रिया भरनी के देखत रूप सिरात न लोचन पेक्षकी पीकी छवि नारी गावत गीत बजावत ढोल मृदंग में चंगन की धुन भरी हावत जातिपुर नागर गागर डार लखे उधि भरी राज करो तब लो जब लो मह जव लग गंग बह जमुनारी ਜਉ ਪ੍ਰਵਾਜ ਰਾਤ ਕੀ ਰਾਤ ਸੁ ਕਹਿ ਕੈ ਇਹ ਭਾਂਤ ਗਨਾਉ ਜਉ ਪ੍ਰਵਾ ਕਬ ਦੇ ਕਹੋ ਜੀ ਬੀਚ ਲ ਜਾਉ ਹਉ ਚਹੁ ਔਰ ਫਿਰਿਓ ਬਸਦਾ ਜਾਤ ਲਿਖਉ ਛਬ ਆਨਨ ਤੇ ਕਿੰ ਪਾਖ ਸੁਨਾਉ ਨੈਨਨ ਬਾਣ ਚ ਹਉ ਦਿਸਮਾਰਤ ਘਾਲ ਕਹਿਐ ਫੁਰਬਾ ਸਾਰਸਵਤੀ ਨਾ ਸਕੈ ਕਹਿ ਰੂਪ ਸ਼ਿੰਗਾਰ ਕਹਿ ਮਦ ਕੌਣ ਵਿਚਾਰੀ ਕੋਕਲ ਕੰਠ ਰਿਉ ਨਿਬਨਾਇਕ ਛੀਨ ਕਪੋਤ ਕੀ ਗਰੀਬ ਅਨੇਯਾਰੀ ਰੀਜ ਗਿਰੇ ਨਰ ਨਾਰ ਧਰਾ ਪਰ ਘੂਤ ਹੈ ਜਨ ਕਾਇਲ ਭਾਰੀ ਦੁਹਰਾ ਨਿਖ ਰੂਪ ਅਜ ਰਾਜ ਕੋ ਰੀਜ ਰਹੇ ਨਰ ਨਾਰ ਕੇ ਚੰਦਰ ਕੇ ਸੂਰੇ ਇਹ ਵਿਦਕਰਤ ਵਿਚਾਰ ਕਵਿਤ ਨਾਗਨ ਕੇ ਛੋਨਾ ਹੈ ਕਿ ਕੀਨੇ ਕਾ ਹੈ ਕਿ ਕਾਮ ਕੇ ਖਿਲਾਉਣਾ ਹੈ ਬਣਾਏ ਹੈ ਸੁਧਾਰ ਕੈ ਇਸ ਰਣੀ ਕੇ ਪ੍ਰਾਨ ਹੈ ਕੇ ਸੁੰਦਰਤਾ ਕੀ ਖਾਨ ਹੈ ਕੇ ਕੌਮ ਕੇ ਕਲਾਨ ਵਿਧ ਕੀਨੇ ਹੈ ਵਿਚਾਰ ਕੇ ਚਾਤਰਤਾ ਕੇ ਭੇਸ ਹੈ ਕੇ ਰੂਪ ਕੇ ਨਰੇਸ ਹੈ ਕੇ ਸੁੰਦਰ ਸੁਦੇਸ਼ ਈਸ ਕੀਨੇ ਚੰਦਰਸਾਰ ਕੈ ਤੇਗ ਹੈ ਕੇ ਤੀਰ ਹੈ ਕੇ ਬਾਨਾ ਬਾਂਧੇ ਵੀਰ ਹੈ ਸੋ ਐਸੇ ਨੇਤ ਅਜ ਕੋ ਬਲੋਕੀ ਸੰਭਾਰ ਕੈ ਸਵਈਆ ਤੀਰਨ ਸੇ ਤਰਵਾਰਨ ਸੇ ਮ੍ਰਿਗ ਭਾਰਨ ਸੇ ਅਬ ਲੋਕ ਜਾਈ ਰੀਜ ਰਹੀ ਰਿਦਵਾਰ ਲਖੇ ਦਦ ਭਾਗ ਪ੍ਰਵਾਹ ਨਹੀਂ ਜਾਤ ਬਤਾਈ ਸੰਗ ਚਲੀ ਉਠ ਬਾਲ ਬਲੋਕਨ ਮੋਰ ਚਕੋਰ ਰਹੇ ਓ ਰਜਾਈ ਅਜ ਰਾਜ ਜਬੈ ਚਿਤ ਦੇਖਤ ਹੀ ਤ੍ਰਿਯ ਲੀਮ ਚੁਰਾਈ ਤੋਮਰਛੰਤ ਅਵ ਲੋਕਿਆਜ ਰਾਜੇ ਅਤ ਰੂਪ ਸਰਬ ਸਮਾਜ ਅਤ ਰੀਜ ਕੈ ਹਸ ਬਾਲ ਗੋਇ ਫੂਲ ਮਾਲ ਉਤਾਲ ਗੈ ਫੂਲ ਕੀ ਕਰੀ ਅਤ ਰੂਪਵੰਤ ਸੋ ਬਾਲ ਕਿਹ ਡਾਰਿਆ ਉਰੀਆਂ ਦਾ ਚਾਰ ਚਾਰ ਨਿਧਾਨ ਦੇ ਦੇਵ ਆਗਿਆ ਕੀਨ ਦਾ ਚਾਰ ਚਾਰ ਪਰਬੀਨ ਸੁਨ ਸੁੰਦਰੀ ਇਮ ਬੈਨ ਸਾਸਿਕਰਾੰਤ ਸੁੰਦਰ ਨੈਣ ਤਵ ਜੋਗ ਹੈ ਅਜ ਰਾਜ ਸੁਨ ਰੂਪਵੰਤ SLAਜ ਬਰਿਆਜ ਤਾ ਕਹ ਜਾਏ ਸੁਨ ਬੈਨ ਸੁੰਦਰ ਕਾਏ ਜੈ ਫੂਲ ਮਾਲ ਪਰਬੀਨ ਔਰ ਡਾਰ ਤਾ ਦੀਨ ਤਾ ਬਾਜ ਅਨੇਕ ਡਫ ਬੀਨ ਵੇਣ ਬਸੇਕ ਡਫ ਢੋਲ ਮਰਦੰਗ ਅਤ ਤੂਰ ਤਰੰਗ ਨੈ ਬਾਸਰੀ ਬਹੁ ਸੁੰਦਰੀ ਸੁਭ ਨੈਣ ਤੇਹ ਵਿਆਹ ਕਾ ਅਜਰਾਜ ਬਹੁ ਪੌਂਦ ਲੈ ਕਰ ਦਾਜ ਗ੍ਰਹਿ ਆਇਆ ਸੁਖ ਪਾਏ ਢਕ ਬੀਣ ਬੀਨ ਬਜਾਏ ਅਜਰਾਜ ਰਾਜ ਰਾਜ ਮਹਾਨ ਦਾ ਚਾਰ ਚਾਰ ਨਿਧਾਨ ਸੁਖ ਸਿੰਧ ਸੀਲ ਸਮੁੰਦਰ ਜਿਨ ਜੀਤਿਆ ਹਰਣ ਰੁਦਰ ਇਹ ਪੌਂਦ ਰਾਜ ਕਮ ਸਿਰ ਅਤਰ ਪਤਰ ਫਿਰਾਏ ਰਣ ਧੀਰ ਰਾਜ ਵਿਸ਼ੇਖ ਜਗ ਕੀ ਉਜਾਸਪੇ ਖੇਖ ਜਗ ਜੀਤ ਚਾਰ ਦੇਸਾਨ ਅਜਰਾਜ ਰਾਜ ਮਹਾਨ ਨਿਪਦਾਨ ਸੀਲ ਪਹਾੜ ਦਾ ਚਾਰ ਚਾਰ ਉਦਾਰ ਦੁਤਿਵੰਤ ਸੁंदर ਨਾਨ ਜੇ ਪੇਖ ਜਿਤ ਮੈਨ ਮੁਖ ਦੇਖ ਚੰਦਰ ਸਰੂਪ ਚਿਤ ਸੋ ਚੁਰਾਵਤ ਭੂਪ ਇਹ ਪਾਂਥ ਕੈ ਬੜ ਰਾਜ ਬਹੁ ਜਗ ਧਰਮ ਸਮਾਜ ਜੋ ਕਹੋ ਸਰਬ ਵਿਚਾਰ ਇਕ ਹੋਤ ਕਥਾ ਪਸਾਰ ਤੇ ਸੋ ਥੋਰੀਏ ਬਾਤ ਸੁਣ ਲਿਓ ਭਾਕੋ ਭਰਾਤ ਬਹੁ ਜਗ ਧਰਮ ਸਮਾਜ ਇਹ ਪਾਂਥ ਕੈ ਅਜ ਰਾਜ ਜਾਗੇ ਆਪਨੋ ਆਜਮਾਨ ਤਰੇ ਆਖ ਆਣ ਨਾ ਆਣ ਤਬ ਕਾਲ ਕੋ ਕਰਵਾਲ ਅਜ ਜਾਰਿਆ ਮਦ ਜਵਾਲ ਅਜ ਜੋਤ ਜੋਤ ਮਿਲਾਨ ਤਬ ਸਰਵ ਦੇਖ ਡਰਾਨ ਜਿਮ ਨਾਵ ਹੀਨ ਜਿਮ ਦੇਹ ਯਰ ਬਲ ਛੀਨ ਜਿਮ ਗਾਂਵਰਾ ਬਹੀਨ ਜਿਮ ਔਰ ਕ੍ਰਿਸ਼ ਛੀਨ ਜਿਮ ਦਿਰਬ ਹੀਨ ਫੰਡਾਰ ਜਿਮ ਸ਼ਾਹੀਨ ਵਪਾਰ ਜਿਮ ਅਰਥਹੀਨ ਕਬਿਤ ਜਿਮ ਪ੍ਰੇਮਕੇ ਜਿਮ ਮਿਤ ਜਿਮ ਰਾਜਹੀਨ ਸੁਦੇਸ਼ ਜਿਮ ਸੈਨਹੀਨ ਨਰੇਸ਼ ਜਿਮ ਗਿਆਨਹੀਨ ਜੁਗਿੰਦਰ ਜਿਮ ਭੂਮਹੀਨ ਮਹਿੰਦਰ ਜਿਮ ਅਰਥਹੀਨ ਵਿਚਾਰ ਜਿਮ ਦਰਬਹੀਨ ਉਦਾਰ ਜਿਮ ਅੰਕੁਸ਼ਹੀਨ ਗజేਸ ਜਿਮ ਸੈਨਹੀਨ ਨਰੇਸ਼ ਜਿਮ ਸ਼ਸਤਰਹੀਨ ਲੁਜਾਰ ਜਿਮ ਬੁੱਧਬਾਜ ਵਿਚਾਰ ਜਿਮ ਨਾਰਹੀਨ ਪਤਾਰ ਜਿਮ ਕੰਤਹੀਨ ਸੋਨਾਰ ਜਿਮ ਬੁੱਧਹੀਨ ਕਬਿਤ ਜਿਮ ਪ੍ਰੇਮਹੀਨ ਸੋ जिम देश रूपविहीन बिनकंत नार धीन जिम पाद बिप्र जिम अर्थहीन सब बिद्ध ते कह सरमनरेस जो आ गए इस देश कर अश दसया पुराणे दिज ब्यास वेद निधान कीने 18 पर्व जग रीदिया सुन सर्ब ए ब्यास ब्रह्म अवतार मुख चार इत ਸ੍ਰੀ ਵਿਕਰਨਾਟ ਗ੍ਰੰਥੇ ਪੰਚਮੋ અવਤਾਰ ब्रह्म ब्यास राजा ਅਜ को ਰਾਜ ਸਮਾਪਤੰ ਅਰਜੁਨ ਤੂੰ ਮਰਛੰਦ ਜੋਗੇ ਆਗ ਲੰਗੇ ਬਿਆਸ ਜੇ ਕੀ ਪੁਰਾਨ ਪ੍ਰਕਾਸ਼ ਤਬ ਬਾਢਿਆ ਤੇ ਗਰਬ ਸਰ ਆਪ ਜਾਣ ਨਾ ਸਰਬ ਤਬ ਕੋ ਕਾਲ ਕਰਵਾਲ ਦੇ ਜਾਲ ਜਵਾਲ ਮਿਸਾਲ ਖਟ ਨਹੀ ਲੀਨ ਪ੍ਰਾਨ ਨਿਕਾਰ ਵੈ ਖਸ ਰਿਖੈ ਅਪਾਰ ਤਿੰਨ ਸਾਸਤਰ ਵਿਚਾਰ ਖਟ ਸ਼ਾਸਤਰ ਨਾਮ ਸੋਡਾਰ ਖਟ ਸ਼ਾਸਤਰ ਕੀਨ ਪ੍ਰਕਾਸ਼ ਮੁਖ ਚਾਰ ਵਿਆਸ ਸੁਭਾਸ ਤਰਖਸ਼ਟਮ અવਤਾਰ ਖਟ ਸ਼ਾਸਤਰ ਸੁਧਾਰ ਇਤਿ ਸ਼੍ਰੀ ਵਿਜੇਤਰਨਾਟਕੀ ਗ੍ਰੰਥੇ ਖਸ਼ਟਮੋ ਅਵਤਾਰ ਬ੍ਰਹਮਾ ਖਸ਼ਟ ਰੇਖ ਸਮਾਪਤੰ ਅਪਜੂ ਤੁਮਰ ਚੰਦ ਇਹ ਬ੍ਰਹਮ ਵੇਦ ਨਿਧਾਨ ਦਸ ਅਸ਼ਟ ਸ਼ਾਸਤਰ ਪਰਮਾਨ कालजुग्य लाग निहार पय कालिदास अविचार लख रीज विक्रमजीत अति गर्ववंत जीत अति अत ज्ञान महान गुनैण शोभत्रांत सुंदर नयन रव कावकीं सुधार कर कालिदास अवतार कहलै बखानो तौन जो कावकीं नो जौन तर शब्द ब्रह्म अवतार तब भयो ता सुधार तब धरा ब्रह्म स्वरूप मुख ਇਤਿ ਸ਼੍ਰੀ ਬਚਿਤ੍ਰਨਾਟਕ ਗ੍ਰੰਥੇ ਸਤਮਉ ਉਪਵਤਾਰ ਬ੍ਰਹਮਾ ਕਾਲੀਦਾਸਾ ਸਮਾਪਤ ਮਸਤ ਸੁਭ ਮਸਤ ਅਪਜੁ